ਸਾਰੀ ਰਾਤ ਆਈ ਕੂਕੇ ਕਰਲਾਂਦੇ ਆ ਪੈਣੀ ਡਰਾਉਣੀ ਬਣੀ ਹੋਈ ਆ ਪਿੰਡ ਵਾਲੇ ਪਾਸੇ ਇੱਕ ਬੁਰੜੀ ਜੀ ਮਾਈ ਆਈ ਐ ਸਵਾੜ ਵਿੱਚ ਡਿੱਗ ਪਈ ਸਾਰੀ ਰਾਤ ਇੱਥੇ ਰੂੰਦੀ ਜਿਹਦਾ ਦਰਖਤ ਨਾਲ ਸਿਰ ਲੱਗਾ ਉੱਥੇ ਹੀ ਲੱਗਾ ਠਾਕਰ ਜੀ ਵਾਰ ਖਿਲਰੇ ਹੋਏ ਆ ਪੰਗਲੇ ਪਾਵੇ ਨੂੰ ਫੜ ਕੇ ਇਹਦੇ ਸੱਚੇ ਪਾਤਸ਼ਾਹ ਜ ਮੇਰੇ ਨਾਲ ਬੋਲਦੇ ਨੇ ਕਦੀ ਮਾਤਾ ਦੇ ਗਾਲ ਨੂੰ ਜਾ ਕੇ ਚੰਬੜਦੇ ਆ ਤਾਂ ਕਵੀ ਲਿਖਦਾ ਜਿਹੜੇ ਸਾਨੂੰ ਹੌਸਲਾ ਦੇਣ ਵਾਲੀਆਂ ਰੂਹਾਂ ਸੀ ਬੇ ਹੌਸਲੇ ਵਿੱਚ ਦੋਵੇਂ ਸਾਡੀਆਂ ਜਗਤ ਮਾਤਾ ਸਤਿਗੁਰੂ ਜੀ ਦੀਆਂ ਨਵਾ ਅੱਖਾਂ ਵਿੱਚੋਂ ਪਾਣੀ ਡਕਿਆ ਨਹੀਂ ਕਿ ਠਾਕਰ ਐ ਜਿੱਤਰਾ ਕੋਈ ਕਿਸੇ ਨੂੰ ਕਿੱਡੀ ਕੁ ਖੇਚ ਹੁੰਦੀ ਆ ਪਾਵੇ ਨੂੰ ਕੁੱਟ ਕੇ ਫੜ ਕੇ ਸਾਥ ਵਾਲੇ ਕੰਨ ਕੋਲ ਕਹਿੰਦੇ ਆ ਸੱਚੇ ਪਾਤਸ਼ਾਹ ਜੀ ਨੀ ਮੇਰੇ ਨਾਲ ਐਉਂ ਕਰਕੇ ਕਵੀ ਲਿਖਦਾ ਮਾਤਾ ਕੀਰਨੇ ਕਰਦੀ ਹਾੜਾ ਗੁਰਪ੍ਰਤਾਪੀ ਜਿਵਿਆ ਜੇ ਦੋ ਕੜੀਆਂ ਵੀ ਮੋੜਿਆ ਹੋ ਕੀ ਅਜ ਗਰੀਬਾ ਨਾ ਦੀ ਤੇ ਜੇ ਖੜੇ ਖਲੋਤੇ ਸੁਣ ਜਾਓ ਅੱਜ ਮੇਰੀ ਬੀਨਾ ਟੁੱਟ ਗਈ ਰੱਬ ਹੁਣ ਕਿਹਦੇ ਢੋਲੇ گاਵਾ ਮੈਂ ਅਸਨਕੇ ਰੋਂਦੇ ਠਾਕਰ ਨੂੰ ਅਗਹੀ ਕਹਿ ਕੇ ਚੁੱਪ ਕਰਾਵਾਂ ਮੈਂ ਖੋਟ ਗਾ ਉਹ ਪਿਆਰਾਂ ਦੀ ਮੁਠੀ ਬੰਦ ਹੋਈ ਉਹ ਰੋ ਕੇ ਅਥਰੂ ਸੁੱਕ ਗਏ ਅਜ ਧਰਤੀ ਨੇ ਲਾਟਾਂ ਛਡੀਆਂ ਨੇ ਤੇ ਪਿਪੜਾਂ ਨੇ ਪੀਂਗਾ ਥੋੜ ਤਿਓ ਗੁਰਪ੍ਰਤੋਪੀ ਦਰਸ਼ਨ ਤੋ ਅੱਜ ਸੰਗਤਾਂ ਖਾਲੀ ਮੋੜਤੀਆਂ ਹਾਈ ਛੱਪ ਗਿਆ ਕਿੱਥੇ ਦਿਲਦਾਰ ਮੇਰਾ ਇਹ ਉਤੋਂ ਲੰਗਦੀ ਹਵਾ ਵੀ ਰਾਹਕਾਰੋਂ ਕੇ ਵੇ ਯਾਦ ਰੂਗਾ ਸਦਾ ਪਿਆਰ ਤੇ ਪੰਜ ਪਾਦਰੋਂ ਦੀ ਆਈ ਰਾਤ ਤੱਤੀ ਵੇ ਦੇਣ ਵਾਲੀ ਹਰ ਪ੍ਰਕਾਰ ਕਰਕੇ ਜਦੋਂ ਗੁਰੂ ਪ੍ਰਤਾਪ ਨੇ ਦੇ ਛੱਡੀ ਸਾਰਾ ਦੇਸ ਰੋਇਆ ਯਾਰ ਹੋ ਯਾਰ ਕਰਕੇ ਉਹ ਦੋਵੇਂ ਸਾਬ ਜਾਨੇ ਬੈਠੇ ਤਾਸ ਦੇਖਣੇ ਰੱਬ ਉਹ ਪਤਾ ਗੁਰੂ ਗਿਆ ਸਾਨੂੰ ਵਿਸਾਰ ਕਰਕੇ ਕੋਈ ਸਈ ਮੈਂ ਖੜਾ ਲਈ ਪਿਆਖੇ ਉਹ ਤੋਖਾ ਦੇ ਉੱਠਿਓ ਬਾਬਾ ਦੇ ਕੂਕਾ ਸਭ ਕੂਕਿ ਉੱਠਿਓ ਉਹ ਧਰਤਾਲ ਪ੍ਰਤਾਪੀ ਦਾ ਧਾਰ ਕੇ ਤੇ ਉਹ ਪਹਿਣ ਸਾਹਿਬ ਜਿ ਭਰਾਂ ਦੀ ਕੂਕ ਉਠੀ ਉਹ ਪਸ਼ੂ ਪੰਛੀ do <laughs> ਸਵੇਰੇ ਸਜਣੋ ਉਹ ਗੱਲ ਦੱਸਣ ਵਾਲੀ ਨਹੀਂ ਜਿਹੜੇ ਮੋਰ ਪਹਿਲਾਂ ਪਾਉਂਦੇ ਸੀ ਤੇ ਬੋਲਦੇ ਸੀ ਗੁੰਮ ਹੋ